ਮੰਦੇ ਬੋਲ ਸ਼ਰੀਕਾਂ ਦੇ ਰਹੇ ਸੁਣਦੇ ਮੰਦੇ ਬੋਲ ਸ਼ਰੀਕਾਂ ਦੇ ਰਹੇ ਸੁਣਦੇ ਤੀਜੇ ਪਾਤਸ਼ਾਹ ਬੜੇ ਪਿਆਰ ਦੇ ਨਾਲ ਮੰਦੇ ਬੋਲ ਮੈਂ ਨਿਮਰਤਾ ਦੱਸਣ ਲੱਗਾ ਸ਼ਰੀਕਾਂ ਦੇ ਰਹੇ ਸੁਣਦੇ ਮੇਰੀ ਜਾਨ ਤੋਂ ਪਿਆਰੇ ਜਵਾਤਰੇ ਦੇ ਤੁਸੀਂ ਚਾਚੇ ਤੇ ਤਾਏ ਉਹ ਜਿਉ ਆਇਆ ਤੁਸੀਂ ਚਾਚੇ ਤੇ ਤਾਏ ਉਹ ਜਿਉ ਆਇਆ ਇਨਾ ਲੰਮਾ ਲਾਹੌਰ ਤੋਂ ਮਾਰ ਪੈਂਡਾ ਤੁਸੀਂ ਚੱਲ ਕੇ ਆਏ ਹੋ ਜਿਉ ਆਇਆ ਉਹ ਜਿਹਨੂੰ ਤੁਸੀਂ ਬਿਆਸਰਾ ਸਮਝਦੇ ਹੋ ਜਿਹਨੂੰ ਤੁਸੀਂ ਬਿਆਸਰਾ ਸਮਝਦੇ ਹੋ ਜੇ ਨੂੰ ਬੇ ਬਿ ਆਸਰਾ ਸਮਝਦੇ ਹੋ ਉਹ ਹੈ ਆਸਰਾ ਲਖਾਂ ਬਿ ਆਸਿਆਂ ਦਾ ਓਏ ਉਹਦੇ ਮੁਖ ਨੂਰਾਨੀ ਤੋਂ ਜਾਂ ਸਦਕੇ ਉਹ ਹੈ ਆ ਬੇ ਹਿਆਤ ਪਿਆਸਿਆਂ ਦਾ ਤੇ ਬਿਨਾ ਸੋਚਿਆ ਸਮਝਿਆ ਭਲੇ ਲੋਕੋ ਬਿਨਾ ਸੋਚਿਆ ਸਮਝਿਆਂ ਭਲੇ ਲੋਕੋ ਇਸ ਤਰ੍ਹਾਂ ਨਾ ਗੁੱਸੇ ਵਿੱਚ ਆਈਦਾ ਇਸ ਤਰ੍ਹਾਂ ਬਿਨਾ ਸੋਚਿਆਂ ਸਮਝਿਆਂ ਭਲੇ ਲੋਕੋ ਇਸ ਤਰ੍ਹਾਂ ਨਾ ਗੁੱਸੇ ਵਿੱਚ ਆਈਦਾ ਏ ਓਏ ਓਦੇ ਸਿਰ ਨਹੀਂ ਤੋਕਰੀ ਰੋਟੀਆਂ ਦੀ ਅਸਲ ਵਿੱਚ ਤਾਜ ਖੁਦਾਈ ਦਾ ਏ ਤਸੂਰ ਜ ਚੰਨ ਤਾਰੇ ਤੇ ਬ੍ਰਹਮੰਡ ਸਾਰਾ ਸੂਰਜ ਚੰਨ ਤਾਰੇ ਤੇ ਬ੍ਰਹਮੰਡ ਸਾਰਾ ਓਏ ਭੁਖਾ ਉਸ ਦੇ ਪਾਗ ਦੀਦਾਰ ਦਾ ਏ ਉਹਦੇ ਹੱਥ ਵਿੱਚ ਢਾਲ ਦੀ ਬਾਲਟੀ ਨਹੀਂ ਉਹਦੇ ਹੱਥ ਵਿੱਚ ਰਿਜ਼ਕ ਸੰਸਾਰ ਦਾ ਏ ਸੂਰਜ ਚੰਨ ਤਾਰੈ ਤੇ ਬ੍ਰਹਮੰਡ ਸਾਰਾ ਉਹਦੇ ਭੁੱਖਾਇਓ ਉਸਦੇ ਪਾਕ ਦਿਦਾਰ ਦਾਇ ਓਏ ਉਹਦੇ ਹੱਥ ਵਿੱਚ ਦਾਲ ਦੀ ਬਾਲਟੀ ਨਹੀਂ ਉਹਦੇ ਹੱਥ ਵਿੱਚ ਰਿਜ਼ਕ ਸੰਸਾਰ ਏ ਸੋਡੀ ਬੰਸ ਦਾ ਵ ਚਮਕਦਾ ਚੰਨ ਹੈ ਉਹ ਤੇ ਸਿਰਜਣਹਾਰ ਦਾ ਰੱਬੀ ਸਰੂਪ ਹੈ ਉਹ ਮੇਰੇ ਦਿਲ ਤੋਂ ਜੇ ਇਕਰਾਮ ਪੁੱਛਦੇ ਹੋ ਮੈਂ ਤਾਂ ਸਮਝਣਾ ਮੇਰਾ ਹੀ ਰੂਪ ਹੈ ਉਹ ਤੁਸੀਂ ਆਖਰੀ ਲਾਈਨਾਂ ਕਹਾਂ ਉਹਦੇ ਸੋਹਣਿਆ ਕਦਮਾਂ ਦੀ ਛੋ ਛੋਪਾ ਕੇ ਵੀਰਾਨੀਆਂ ਚੋਂ ਕਲੀਆਂ ਖਿਲਣਗੀਆਂ ਤੇ ਸਮਾਇਉਗਾ ਉਹ ਦੇਸ ਰੋਵਰਾ ਚੋਂ ਨਾਮਦਾਨ ਤੇ ਮੁਕਤੀਆਂ ਮਹਿਣਗੀਆਂ ਵਸਣ ਵਰਕ ਤਾਂ ਮੈਂ ਉਹਦੀ ਨਿਗਾਇੰਤ ਉਹਦੇ ਦਰ ਤੋਂ ਚੂੜੀਆਂ ਪਰਨ ਤੇ ਨਿਉ ਨਿਉ ਕੇ ਸੈਂਕੜੇ ਵੈ ਸ਼ੈਣ ਸ਼ਾਈਆਂ ਉਹਦੇ ਮੰਦਰਾਂ ਤੇ ਸਜਦੇ ਕਰਨਗੀਆਂ ਉਹਦੇ ਮੰਦਰਾਂ ਤੇ ਸਜਦੇ ਕਰਨਗੀਆਂ ਜਦ ਜਨੋ ਤਿਕਰੋਂ ਮੇ ਰਹਣਗੇ ਚੰਨ ਤਾਰੇ ਰੁੱਤਾਂ ਬਦਲ ਕੇ ਆਉਂਦੀਆਂ ਜੇ ਜੁਗਾਤੀ ਕਰਾਂ ਮੈ ਲੈ ਰਾਂ ਬਿਆਸ ਦੀਆਂ ਮੈ ਮੈ ਉਸ ਦੀ ਗੁੰਦੀਆਂ ਰੇ